ਨੇ ਮਹੱਲਾ ਪੰਜਵਾਂ ਜਹਿ ਡੜਾ ਤ੍ਰਿਣ ਗਾਫਲ ਜਲਿਓ ਭਾਈ ਜਿੰਨਾ ਭਾਗ ਮਥਾੜੈ ਤਿੰਨ ਉਸਤਾਦ ਪਨਾਹੀ ਹਾਂ ਜਿਹੜਾ ਸੰਸਾਰ ਸੰਸਾਰ ਇਹ ਬਹੁਤ ਬੜਾ ਖੱਡਾ ਜਿਵੇਂ ਹਾਥੀ ਨੂੰ ਫੋੜਨ ਵਾਸਤੇ ਬਹੁਤ ਬੜਾ ਖੱਡਾ ਉੱਟਦੇ ਵੀ ਥੱਲੇ ਕੁੱਤੇ ਉਹਦੇ ਘਾਫੂ ਇਖਲਾਾਰ ਦਿੰਦੇ ਨੇ ਤਾਂ ਕਿ ਉਹਨੂੰ ਪਤਾ ਨਾ ਲੱਗੇ ਵੀ ਖੱਡਾ ਥੱਲੇ ਇਹਨੇ ਜੋ ਕੋ ਸੰਸਾਰ ਦੇ ਵਿੱਚ ਦੀਨ ਸੱਚ ਨਹੀਂ ਹੈ ਇਹ ਸਭ ਕੁਝ ਖੰਡੇ ਦੀ ਸੁੱਟਾਂ ਵਾਹੀ ਹੈ ਜੋ ਦੀਨ ਤੇ ਗੈਰੇ ਖੰਡੇ ਚ ਲੈ ਕੇ ਡਿੱਗੂਗਾ ਵੀ ਨਿਕਲਣਾ ਨਹੀਂ ਫਿਰ ਨਿਕਲ ਨਹੀਂ ਸਕਦਾ ਇਹ ਜਿਹੜੇ ਜੀ ਜੰਤ ਨੇ ਨਾ ਸਣ 38 ਲੱਖ ਜੂੜ ਇਹ ਤੜਕੇ ਨਾ ਜਾਨਦਾਰ ਤਾਂ ਹੈ ਤੇ ਧੋਖਾ ਇਹ ਜੇ ਛਾਇਆ ਹੋਇਆ ਤੇ ਧੋਖਾ ਛਾਇਆ ਹੋਇਆ ਉੱਤੇ ਕਾਫਲ ਜਿਹੜਾ ਹੋ ਜਾਂਦਾ ਨਾ ਭੁੱਲ ਜਾਂਦਾ ਵੀ ਹਾਂ ਇਹਦੇ ਜਿੱਥੇ ਬਾਹਰ ਦੇਖ ਕੇ ਬਾਹਰੇ ਜੀ ਲਾ ਲੈਂਦਾ ਸੰਸਾਰ ਨਾਲ ਜੀ ਲਾ ਲੈਂਦਾ ਬੰਦ ਲਾ ਲੈਂਦਾ ਸੰਸਾਰ ਨਾਲ ਧਿਆਨ ਲਖਦਾ ਜੋੜ ਕੇ ਜਿਹੜਾ ਵਾਇਆ ਦੀ ਛਾਇਆ ਨਾਲ ਧਿਆਨ ਜੋੜੀ ਰੱਖਦਾ ਉਹ ਜਲੇ ਪਾਹੇ ਉਹ ਨਾਲ ਜਲਦਾ ਫਿਰ ਉਹ ਤ੍ਰਿਸ਼ਨਾ ਦੀ ਅੱਗ ਜੀ ਜਲਦਾ ਰਹਿੰਦਾ ساری ਉਮਰ ਵਾਅਦੇ ਵਿੱਚ ਉਹਦਾ ਸ਼ਰੀਰ ਹੈ ਰੂਹ ਯਗਨਾ ਜੜ ਦਿੰਦੇ ਨੇ ਜਿੰਨਾ ਭਾਗ ਹੀ ਪਿਠਾੜ ਹੈ ਦੇ ਭਾਗ ਹੁੰਦੇ ਨੇ ਨਾ ਬੱਚੇ ਤੇ ਚੰਦੇ ਉਹਨਾਂ ਦੇ ਕੰਨ 'ਚ ਗੱਲ ਪੈ ਜਾਂਦੀ ਹੈ ਗੁਰੂ ਦੀ ਔਰ ਉਹ ਲੈਂਦੇ ਨੇ ਮੰਨੂ ਭਾਗ ਮਟਾੜੇ ਉਹਨਾਂ ਦੇ ਜਿਹੜੇ ਗੱਲ ਗੁਰਬਾਣੀ ਦੀ ਮੰਨ ਲੈਂਦੇ ਨੇ ਜਿਹੜੇ ਨਹੀਂ ਮੰਨਦੇ ਉਹ ਭਾਗੇ ਰਹਿ ਜਾਂਦੇ ਨੇ ਤੈਨੂੰ ਉਸ ਥਾਲ ਬਣਾਏ ਉਹ ਗੁਰਬਾਨੀ ਦੀ ਬਣਾ ਲੈ ਲੰਨੇ ਨੇ ਉਹ ਸਤਗੁਰ ਦੀ ਓਟ ਲੈ ਲੈਣੇ ਬਣਾ ਲੈ ਲੰਨੇ ਨੇ ਕੋਟ ਵਿੱਚ ਬੈਠ ਜਾਂਦੇ ਨੇ ਉਹ ਸਥਾਲ ਨਹੀਂ ਦੇਖਦੇ ਫਿਰ ਉਹ ਬਾੜ ਮੁਖੀ ਦੀ ਹੁੰਦੇ ਆ ਮੁਖੀ ਦੇਖਦੇ ਨੇ ਆਪਣੇ ਉੱਤਰ ਆਤਮਾ ਨਾਲ ਜੁੜੇ ਰਹਿੰਦੇ ਨੇ ਆਪਣੇ ਉੱਤੇ ਰਾਮ ਨਾਲ ਜੁੜੇ ਰਹਿੰਦੇ ਨੇ ਹੋਜੀ ਇੱਕ ਤਾਂ ਕਹਿੰਦੇ ਆ ਜੀ ਤੇਰੀ ਝੂੰਗੀ ਫੂਸ ਦੀ ਬਣੀ ਹੋਈ ਹੈ ਬੇਪਰਵਾ ਬੰਦੇ ਤੂੰ ਇਸ ਅੰਦਰ ਅੱਗ ਬਾਲਦਾ ਹੈ ਇੱਕ ਤਾਂ ਇਹ ਅਰਥ ਹੈ ਜੀ फरीदकोट वाले कहते हैं हे भाई शरीर रूप छप्पर अस्थि नाड़ी रूप घास कर छाया हुआ है गाफल जीव इसको काल रूप अग्नि करके जलवा हुआ जान वा संसार रूप टोआ है और पदार्थ रूप तृणों कर अछाया है और बीच तृष्णा काम क्रोध अग्नि ਪਸ਼ੂ ਸਮ ਗਾਫਲ ਜੂ ਪਦਾਰਥ ਰੂਪ ਤ੍ਰਿਣੋਂ ਕੇ ਲਾਲਚ ਇਸ ਕੇ ತೋਏ ਮੇਂ ਪੜਕਰ ਅਗਨੀ ਮੇਂ ਜਲਾ ਹੈ ਇਹਨਾਂ ਦੇ ਇਹ ਹੈ ਜੀ ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਹੈ ਜੀ ਉਹ ਗੱਡੜਾ ਸਰੀਰ ਨੂੰ ਕਹਿੰਨੇ ਆ ਜੀ ਗਾਫਲ ਮਨੁੱਖ ਦਾ ਘਾਹ ਨਾਲ ਬਣਿਆ ਹੋਇਆ ਸਰੀਰ ਛੱਪਰ ਤ੍ਰਿਸ਼ਨਾ ਦੀ ਆਗ ਵਿੱਚ ਸੜ ਰਿਹਾ ਹੈ ਤੇ ਜੇ ਆਪਾਂ ਇਸੇ ਸ਼ਬਦ ਦੀ ਵਿਆਖਿਆ ਦੇਖੀਏ ਜੇ ਭਾਈ ਕਾਂ ਸਿੰਘ ਨਾਭਾ ਨੇ ਕੀ ਕੀਤੀ ਸੰਗਿਆ ਗ੍ਰਹਿਣ ਕਰਨ ਵਾਲਾ ਉਹ ਟੋਆ ਜੋ ਹਾਥੀ ਦੇ ਫੜਨ ਲਈ ਜੰਗਲ ਵਿੱਚ ਖੋਦੇ ਤੇ ਘਾਹ ਨਾਲ ਟਕਿਆ ਜਾਂਦਾ ਹੈ। ਇਹਦਾ ਮਤਲਬ ਹੈ ਕਿ ਕਾਨ ਸਿੰਘ ਨਾਭਾ ਜੀ ਦੇ ਅਰਥ ਠੀਕ ਹੈ ਸਖਰ ਦੇ ਹਾਂਜੀ। ਆ ਕੁਝ ਨੇੜੇ ਨੇ। ਕੁਝ ਨੇੜੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਤਾਂ ਇਸ ਗੱਲ ਦੀ ਬਹੁਤਾ ਗਿਆਨ ਨਹੀਂ ਸੀ। ਤਾਂ ਕਿਉਂਕਿ ਗੱਡੇ ਤੋਂ ਹੀ ਗੱਡੜਾ ਵਾੜ ਸ਼ਬਦ ਬਣਿਆ ਖੱਡੇ ਤੋਂ ਹੀ ਬਣਨਾ ਚਾਹੀਦਾ ਸੀ ਠੀਕ ਹੈ ਜੀ। ਜਿੰਨਾ ਭਾਗ ਮਠਾੜੇ ਤਿੰਨ ਉਸਤਾਦ ਬਣਾਹੀਂ ਹਾਂ ਜਿਹੜਾ ਵੀ ਭਾਗ ਚੰਗੇ ਹੁੰਦੇ ਨੇ ਹਰਬਾਣੀ ਦੀ ਛਾਣ ਗੁਰਬਾਣੀ ਦੀ ਛਾਣ ਲੈਣਾਂ ਨੇ ਚਲੇ ਜਾਂਦੇ ਨੇ ਉਹ ਸੰਸਾਰ ਬਾਹਰ ਮੁਖੀ ਨਹੀਂ ਰਹਿੰਦੇ ਠੀਕ ਹੈ ਉਸਤਾਦ ਇੱਥੇ ਮੂਲ ਵਾਸਤੇ ਵਰਤੇ ਜੀ ਸਾਧਗੁਰੂ ਵਾਸਤੇ ਵਰਤੇ ਹਾਂਜੀ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਵਾਜੋਂ ਸਤਿਗੁਰ ਆਪਣੇ बैठा ਝਾਕ ਦਰੂਦ ਹਾਂ ਨਾਲਕ ਪੀਠਾ ਪੱਕਾ ਸਾਜਿਆ ਉਹ ਪੀਠਾ ਵਾਲੇ ਨੇ ਪੀਠ ਵੀ ਦਿੱਤਾ ਪਕਾਉਣ ਨਾਲ ਪੱਕਾ ਵੀ ਪਕਾ ਵੀ ਦਿੱਤਾ ਸਾਜ ਵੀ ਦਿੱਤੇ ਸ਼ਬਦ ਸ਼ਬਦਾਂ 'ਚ ਸਾਜ ਵੀ ਕਰਤਾ ਸਾਜਣਾ ਵੀ ਕਰਤੀ ਗੁਰਬਾਣੀ ਤਰਿਆ ਆਣ ਮजूद ਧਰਵੀ ਦਿੱਤਾ ਸਾਹਮਣੇ ਲਿਆ ਕੇ ਤੁਹਾਡੇ ਦੂਰ ਵੱਡਾ ਝਾਕਦਾ ਰਹਿੰਦਾ ਕੁਰਬਾਨੀ ਦੂਵੀ ਇਹਨੂੰ ਖਾਵਾਂ ਕ ਨਾ ਖਾਵਾਂ ਬੰਨਾ ਕ ਨਾ ਬੰਨਾ ਜੇ ਕੋ ਖਾਵੇ ਜੇ ਕੋ ਪੁੱਜੇ ਤਿਸਕਾ ਹੋਵੇ ਉਦਾਰੋ ਇਹ ਸੁਣ ਕੇ ਪਿਛਲਾ ਮਹਾਬਾਦ ਸੁਣ ਕੇ ਦੂਰ ਬੈਠਾ ਹੀ ਫੇਰ ਵੀ ਝਾਕਦਾ ਰਹਿੰਦਾ ਵੀ ਖਾਵਾਂ ਕ ਨਾ ਖਾਵਾਂ ਤਾਂ ਪਤਾ ਹੈ ਜੇ ਕੋ ਖਾਵੇ ਜੇ ਕੋ ਪੁੱਜੇ ਇਹਤੇ ਵੀ ਨਾ ਉਦਾਰ ਨਹੀਂ ਹੋਣਾ ਤਾਂਦਾਰ ਹੋਊਗਾ ਫੇਰ ਵੀ ਖਾ ਰਹੇ ਉਹ ਇਹਦਾ ਮਨ ਲਵਾਇਆ ਗੁਰਬਾਣੀ ਤੋਂ ਬਹੁਤ ਦੂਰ ਬੈਠੇ ਨੇ ਸਲਾਹ ਕਰਦੇ ਨੇ ਪੁੱਛੇ ਤੇ ਬਿਨਾਂ ਆਪਣੀ ਮਰਜ਼ੀ ਦੀ ਅਰਦਾਸ ਕਰਦਾ ਬੰਗ ਮੰਗਦਾ ਅੱਛਾ ਜੀ ਸਾਧਕ ਨੂੰ ਆਪਣੇ ਹਾਂਜੀ ਸਾਧਕ ਨੂੰ ਪੁੱਛ ਕੇ ਦੀਏ ਦੁਆ ਕਰਦਾ ਮਨਮਤ ਦੀ ਦੁਆ ਕਰਦਾ ਮਨਮਤ ਦੀ ਮੰਗ ਮੰਗਦਾ ਠੀਕ ਹੈ ਜੀ ਗੁਰਬਾਣੀ ਨੂੰ ਪੜਨ ਤੋਂ ਹਲਕ ਕਰਦਾ ਹੈ ਅਰਥ ਨਹੀਂ ਖੋਜਦਾ ਆਪਣੇ ਮਨ ਦੀ ਮੰਗ ਰੱਖਦਾ ਹੈ ਈ ਗੁਰਬਾਣੀ ਨੂੰ ਪਰਦਾ ਵੀ ਹੈ ਸਮਝਦਾ ਵੀ ਹੈ ਜੋ ਸਤਗੁਰ ਨਾਲ ਗਿਆ ਉਹ ਨੂੰ ਮੰਨਦਾ ਆਪਣੇ ਮਰਜ਼ੀ ਦੀ ਮੰਗ ਕਰਦਾ ਸਤਗੁਰ ਦਾ ਕਹਿੰਦਾ ਬਿਰਦੁੱਤ ਹੋਰ ਜੇ ਡੁੱਗਣਾ ਸੈ ਦੁੱਖਾਂ ਕੇ ਦੁਖ ਇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਇਹ ਮੰਗ ਨਹੀਂ ਬੰਗਦਾ ਇਹ ਤਾਂ ਹੱਟ ਵੀ ਮੰਗ ਮੰਗਦਾ ਆਪਣੀ ਮਰਜ਼ੀ ਦੀ ਜਦੋਂ ਕੋਈ ਚਾਹਨਾ ਮੰਗਣ ਉਹ ਮੰਗ ਨਹੀਂ ਮੰਗਦਾ ਸਤਗੁਰ ਨੂੰ ਛੱਡ ਕੇ ਆਪਣੇ ਮਨਮਰਜ਼ੀ ਦੀ ਮੰਗ ਮੰਗਦਾ ਇਹ ਮਾਇਆ ਦੇ ਵਿੱਚ ਰਚਿਆ ਲੱਗਦਾ ਹੈ ਅਰਦਾਸ ਆਪਣੀ ਮਰਜ਼ੀ ਮਨ ਮੁਖਤਿਆਰੀ ਅਰਦਾਸ ਕਰਦਾ ਹੈ ਕਹੇ ਲੋ ਅਰਦਾਸ ਕਰਨ ਵੇ ਗੁਰਬਾਣੀ ਨੂੰ ਛੱਡ ਦਿੰਦਾ ਹੈ ਗੁਰਬਾਣੀ ਜਿਹੜੇ ਉਹ ਅਰਦਾਸ ਨਹੀਂ ਕਰਦਾ ਜਿਹੜੀ ਜਿਹੜੀ ਅਰਦਾਸ ਕਰ ਨੂੰ ਗੁਰਬਾਣੀ ਕਹਿੰਦੀ ਹੈ ਜੋ ਗੁਰਬਾਣੀ ਕਹਿੰਦੀ ਹੈ ਮੰਗੋ ਉਹ ਨਹੀਂ ਮੰਗਦਾ ਮੰਗ ਆਪਣੀ ਮਰਜ਼ੀ ਦੀ ਕਰਦਾ ਅਰਦਾਸ ਆਪਣੀ ਮਰਜ਼ੀ ਦੀ ਕਰ ਅਸਲ ਰੱਖਦਾ ਹੈਗਾ ਵੀ ਅਰਦਾਸ ਜਿਹੜੀ ਮਾਇਆ ਦੀ ਹੋਵੇ ਹਾਂ ਚਾਹ ਕੁਝ ਹੋਰ ਹੈ ਗੁਰਬਾਣੀ ਕਹਦੀ ਉਹ ਜਾਦ ਨਹੀਂ ਹੈ ਚਾਹ ਕੁਝ ਹੋਰ ਹੈ ਅਗੋ ਅਗੋ ਤੋਂ ਹਟ ਵੀਡੀਓ ਠੀਕ ਹੈ ਜੀ ਤੇ ਦਰੂਦ ਦਾ ਭਾਵ ਦੁਆ ਹੋ ਗਿਆ ਹਾਂ ਬਾਰੇ ਸ਼ਬਦ ਆਉਂਦਾ ਗੁਰਬਾਣੀ ਦਾ ਲਫਜ਼ਾ ਆਪਾਂ ਲੈ ਕੇ ਚੱਲਦੇ ਹਾਂ ਮੁਸਲਮਾਨਾਂ ਦੀ ਭਾਸ਼ਾ ਦਾ ਇਹਦੇ ਬਣਦੇ ਨੇ ਤਾਂ ਫਿਰ ਇਸ ਤਰੀਕੇ ਨਾਲ ਅਸੀਂ ਕਰਾਂਗੇ ਪਰ ਆਪਣੇ ਆਪਣੇ ਤੋਂ ਪੁੱਛੇ ਬਿਨਾਂ ਬੈਠਾ ਅਗੋ ਰੱਖਦਾ ਜਿਹੜੀ ਉਹ ਬਾਹਿਆ ਦੀ ਰੱਖਦਾ ਸਤਗੁਰ ਦੀ ਖਰਾਕ ਦੀ ਦਿੰਦਾ ਆਪਣੇ ਪੇਟ ਦੀ ਖਰਾਕ ਮੰਗਦਾ ਸਤਿਗੁਰ ਕੀ ਸੇਵਾ ਸਭਲਾ ਜੇ ਕੋ ਕਰੇ ਚਤਲਾਏ ਗੁਰਬਾਣੀ ਤੋਂ ਸਰਬ ਤੋਂ ਸਤਿਗੁਰ ਦੀ ਖੁਸ਼ਾਹਤ ਨੂੰ ਦ੍ਰਿਸ਼ਟੀ ਕੀ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਉਹ ਗਿਆਨ ਦੀ ਬਜਾਏ ਆ ਰੋਟ ਮੰਦਰਾ ਖਾਣ ਨੂੰ ਆਪਣੇ ਖਾਣ ਨੂੰ ਆ ਦੁੰਦਰਾ ਨਾਖਰੀ ਮੰਗਦਾ ਜਿਹਦੇ ਨਾਲ ਸੰਤੋਖ ਹੋਣ ਉਹ ਨਾਲ ਨਹੀਂ ਮੰਗਦਾ ਆਇਆ ਜਿਹਦੇ ਨਾਲ ਹੋਰ ਤ੍ਰਿਸ਼ਨਾ ਭੜਕਣੀ ਹੈ ਜਿਹਨਾਂ ਤ੍ਰਿਸ਼ਨਾ ਦੀ ਅੱਗ ਹੋਰ ਵੱਧਣੀ ਹੈ ਉਹ ਚੀਜ਼ ਮੰਗਦਾ ਔਰ ਤੇ ਤੇਲ ਪਾਉਂਦਾ ਹੋਰ ਸਭ ਹਾਂਜੀ ਮਹੱਲਾ ਪੰਜਵਾਂ ਨਾਨਕ ਪੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨਨੀ ਗੁਰੂ ਮਨਾਇਆ ਰਜ ਰਜ ਸੋਈ ਖਾਂ। ਹਣ ਕਹਿੰਦਾ ਪੂਸਰੀਆਂ ਪਕਾਈਆਂ ਜਿਹੜੀ ਹੱਲੇ ਵਿੱਚ ਤਾਂ ਸੋ ਰੋਟੀਆਂ ਦਾ ਦੇਵਤੇ ਦੀ ਫਿਰ ਦੇ ਕੌਣ ਰਹਿਦਾ ਦੇਵ ਰਹਿਦਾ ਇਹ ਪੂਸਰੀ ਐ ਫਿਰ ਦੀ ਆਵਾਜ਼ ਐ ਉਹਦੇ ਵਿੱਚੋਂ ਹੱਦੇ ਜੋ ਸੁਰ ਦਿੱਕਰੀ ਐ ਏ ਪਕਾਈਆਂ ਨੇ ਜਿਹੜੀਆਂ ਗੱਲਾਂ ਨੇ ਇਦਾਂ ਲੱਕ ਪਕਾਇਆਂ ਨੇ ਉੱਥੋਂ ਸਿਰਫ ਆਈਆਂ ਵੀਆਂ ਇਹ ਨਹੀਂ ਕਹਤੀਆਂ ਪਕਾ ਕੇ ਕਈਆਂ ਨੇ ਸਬਦ ਕੇ ਵਿਚਾਰ ਕੇ ਪਾਈਆਂ ਥਾਲੇ ਮਾਣੇ ਨੇ ਰੂਹ ਥਾਲੇ ਮਾਣੇ ਪਾਤੀਆਂ ਅੱਖਰਾਂ ਚ ਪਾਤੀਆਂ ਅੱਖਰਾਂ ਦੇ ਵਿਖਤੀਆਂ ਅੱਖਰਾਂ ਦੇ ਥਾਲ ਚ ਗਲਤ ਕਰਤੀਆਂ ਤੇ ਕੇ ਰੱਖਤੀਆਂ ਅੱਖਰਾਂ ਦੇ ਵਿੱਚ ਅੱਖਰ ਰੂਪੀ ਥਾਲ ਚ ਸਜਾ ਕੇ ਰੱਖਤੀਆਂ ਜਿੰਨੇ ਗੁਰੂ ਮਨਾਇਆ ਜਿਨ੍ਹਾਂ ਨੇ ਗੁਰੂ ਮਨਾ ਲਿਆ ਨਾਜ ਰਾਜ ਸਹੀ ਖਾਣ ਜਿਨ੍ਹਾਂ ਨੇ ਆਪਣੇ ਅੰਦਰ ਆਤਮਾ ਨੂੰ ਬੁਣਾ ਲਿਆ ਉਹ ਖਾ ਰਹੇ ਨੇ ਵੀ ਖਾ ਲੋ ਚੰਦੇ ਰਹਾਂਗੇ ਇਹੀ ਖਾ ਲੋ ਸਤਿਗੁਰ ਦੇ ਨਾਲ ਜਿਹੜੇ ਲੜਕੇ ਬਣਾ ਲਿਆ ਜੀ ਇਹਨੇ ਆਪਣਾ ਮਨ ਜਿਹੜੀ ਬੁੱਧੀ ਨੇ ਮਨ ਨੂੰ ਆਪਣੇ ਸਤਿਗੁਰ ਨਾਲ ਲੜ ਕੇ ਬਣਾ ਲਿਆ ਉਹ ਰਜਰਾ ਦਿਖਾ ਰਹੇ ਠੀਕ ਹੈ ਜੀ ਇਹ ਗਿਆਨ ਰੂਪੀ ਭੋਜਨ ਦੀ ਗੱਲ ਹੈ ਜੀ ਹਾਂ ਆਪਣਾ ਮੁਤਾਬਣੀ ਚ ਵੀ ਇਹੀ ਲਿਖਿਆ ਨਾ ਥਾਲੇ ਵਿੱਚ ਜਾਂ ਥਾਲ ਵਿੱਚ ਤਿੰਨ ਵਸਤੂ ਪਈਓ ਆ ਮੁਤਾਬਣੀ ਵਿੱਚ ਵੀ ਇਹੀ ਹੈ ਉਹੀ ਗੱਲ ਹੈ ਠੀਕ ਹੈ ਜੀ ਤੇ ਜਿਨ੍ਹਾਂ ਨੇ ਇਹ ਭੋਜਨ ਛਕਿਆ ਹੈਗਾ ਅਸਲ 'ਚ ਉਹਨਾਂ ਨੇ ਹੀ ਗੁਰੂ ਨੂੰ ਮਨਾਇਆ ਹੈ ਜੀ। ਹੋរី ਰੰਝੇ ਨੇ ਉਹਨਾਂ ਨੂੰ ਆਨੰਦ ਹੋ ਗਿਆ। ਭੁੱਖੇ ਨਹੀਂ ਕੋਈ। ਸਰੂਪ ਹੋ ਗਏ ਕੋਈ ਹੱਤਮਾਨ ਨਹੀਂ ਰਾਜਾ ਕੋਈ ਹੰਸਮਾਨ ਲੱਗਿਆ ਹੋਇਆ ਨਹੀਂ ਹੈ। ਜਿਹਦੇ ਅੰਦਰ ਭੁੱਖੇ ਨਾਲ ਕੁਝ ਹੋਵੇ। ਹਰ ਕਾਇੂਬ ਹੋ ਗਏ ਹੋ। ਹਾਂ ਜੀ। ਹੋੜੀ ਤੁਦ ਜਗ ਮੈਂ ਖੇਲ ਰਚਾਇਆ ਵਿੱਚ ਹਉਮੈ ਪਾਇਆ ਇੱਕ ਮੰਦਰ ਪੰਜ ਚੋਰ ਹੈ। ਨਿਤ ਕਰੇ ਬੁਰਾਈਆਂ ਜੱਗ ਦੇ ਵਿੱਚ ਪਰਮੇਸ਼ਰ ਦਾ ਖੇਲ ਚੱਲਿਆ ਹੋਇਆ ਆਹੋਂ ਪਿਆਲਾ ਵਿੱਚ ਪਾਤਾ ਮਨ ਜਿਹਨੂੰ ਹੋਂਦੇ ਆਂਰਵਰ ਮਾਇਆ ਵਾਲੇ ਦੋਹੇ ਪਾਸੇ ਵਿੱਚ ਜੀ ਪਾਤਾ ਹੋਵੇ ਹੋਵੇ ਪਾਈਆ ਤਾਂ ਖੇਲ ਬਣਿਆ ਨਹੀਂ ਪੈਦੀ ਹੋਦੀ ਹੈ ਹੌਰ ਮੈਂ ਤਾਂ ਗ੍ਰਸਤ ਚੇਤਰ ਮਨ ਦੋਹੇ ਪਾਸੇ ਦੋਹੇ ਪਾਈ ਪਾਸੇ ਇੱਕ ਬੰਦਰ ਪੰਜ ਚੋਰ ਸਾਰੇ ਕੋਈਆ ਬੰਦਰ ਕੋਈਆ ਹਿਰਦਾ ਕੋਈ ਹੈ ਚੋਰ ਬਣ ਜੇ ਪੰਜ ਚੋਰ ਹੈ ਪੰਜ ਚੋਰ ਨੇ ਕਰਿਆ ਬੁਰੇ ਆਇਆ ਹੁੰਦਾ ਤੇ ਬੁਰੇ ਹੀ ਕਰਦੇ ਨੇ ਜਿੰਨਾ ਕੰਮ ਕੋਈ ਕਰਦਾ ਹੀ ਨਹੀਂ ਉਹ ਸੋਚਦੇ ਬੁਰਾਈ ਨੇ ਕਰਦੇ ਵੀ ਕੁਝ ਕਰਿਆ ਬੁਰਿਆਂ ਸੋਚ ਉਹਨਾਂ ਦੀ ਬੁਰੀ ਹੋ ਐ ਸੋਚਣੇ ਹੀ ਕਰਦੇ ਉਹ ਨਹੀਂ ਚੰਗਾ ਸੋਚਦੇ ਕਿਸੇ ਦਾ ਉਹ ਆਪਣਾ ਚੰਗਾ ਨਹੀਂ ਸੋਚਦੇ ਕਿਸੇ ਦਾ ਕੀ ਚੰਗਾ ਸੋਚਣ ਅਸਲ 'ਚ ਆਪਣਾ ਹੀ ਦੀ ਚੰਗਾ ਸੋਚਦੇ ਕਿਸੇ ਦੇ ਕੀ ਬੁਰਾ ਸੋਚਣਗੇ ਚੰਗਾ ਸੋਚਣਗੇ ਚੰਗੇ ਰਾਹ ਨਹੀਂ ਤੁਰ ਰਹੇ ਜੀਵਨ ਦਾ ਲਾਹਣ ਨੀ ਲੈ ਰਹੇ ਹੋ ਹਾਂਜੀ ਅੱਛਾ ਤੂੰ ਜਗ ਮੈਂ ਖੇਲ ਰਚਾਇਆ ਤੂੰ ਭਾਵ ਆਪਣੇ ਇਥੇ ਪਰਮੇਸ਼ਰ ਦੀ ਗੱਲ ਹੈ ਜੀ ਜੀਵ ਨੂੰ ਹੁਕਮ ਦੇ ਪਾਇਆ ਹੁਕਮ ਦੇ ਬਿਨਾਂ ਜਨਮ ਨਹੀਂ ਲੈ ਸਕਦਾ ਇਸ ਕਰਕੇ ਹੁਕਮ ਦੀ ਗੱਲ ਕਰਾਂਗੇ ਤੂੰ ਇੱਥੇ ਫਿਰ ਹੁਕਮ ਵਾਸਤੇ ਆਇਆ ਹਾਂ ਆ ਤੂੰ ਹੁਕਮ ਠੀਕ ਹੈ ਜੀ ਇਹ ਖੇਲ ਹੈ ਜਿਹਦੇ ਵਿੱਚ ਕੀ ਮਨ ਔਰ ਚਿੱਤ ਨੇ ਆ ਕੇ ਖੇਡ ਖੇਡਣੀ ਹੈ ਜੀ ਖੇਡਣ ਦੇ ਤਾਂ ਉਹੀ ਜਿਹੜੇ ਪਾਇਏ ਨੇ ਠੀਕ ਹੈ ਜੀ दस नारी एक पुरुष कर दसए स्वाद लुभाइयां इन माया मोहनी मोहिया नित फिरे परमाइयां जान इंद्रियां जान दस नारी नारी, नारी नाड़ियां ने जान इंद्रियां एक पुरख कर पुरुष के अंदर ओदे बच्चे चने दो ने कान ने दो ने ਸਮਾਗਮੀ ਇੱਕ ਦਾ ਜੀਪਸ ਸੈਨਾਲ ਜੁੜੀ ਹੋਈ ਨਾੜੀ ਹੈ ਸਾਰਾ ਸਰੀਰ ਹੈ ਜਿਹੜਾ ਤੇ 10 ਦਵਾ ਰਹੇ ਨੇ 10 ਨਾਲੇ ਜੁੜਿਆ ਹੋਇਆ ਉਰਕ ਇੱਕੋ ਹੀ ਹੈ ਠੀਕੀ ਗੱਲ ਤੁਸੀਂ ਇੱਕੋ ਹੀ ਹੈ ਨਾਰੀਆਂ ਕਿਹੜੀਆਂ ਜੀ 10 ਗਿਆਨ ਇੰਦਰੀ ਕਿਹੜੇ ਕਿਹੜੇ ਦੋ ਅੱਖਾਂ ਨੇ ਅੱਛਾ ਜੀ ਦੋ ਕੰਨ ਨੇ ਜੀਵ ਹੈ ਚਮੜਾ ਹੈ ਸਪਰਸ਼ ਦਾ ਸੇ ਬਾਕੀ ਦੋ ਜਿਹੜੇ ਨੇ ਸਮੈਲ ਦੇ ਨੱਕ ਹੈ ਜੀ ਪਰ ਬਾਹਰੋਂ ਦੇ ਦੁਆਰ ਦੇ ਜਿਹੜੇ ਮਤਲਬ ਹੈ ਵਾਲੇ ਬਾਹਰ ਠੀਕ ਹੈ ਜੀ ਉਹ ਉਹ ਵੀ ਦੋ ਨੇ ਕਿਹਦੇ ਹੁੰਦਾ ਹੈ ਦਾ ਆ ਬ੍ਰੇਨ ਠੀਕ ਹੈ ਜੀ ਠੀਕ ਹੈ ਪਰ ਇਹ ਸਭ ਪਰ ਚਿੱਤ ਦਾ ਹੀ ਕੰਟਰੋਲ ਹੈ ਜੀ ਇੱਕ ਪੁਰਖ ਹਾਂ ਜੀ ਬਾਦ ਦਾ ਕੰਟਰੋਲ ਸਾਰੀ ਦਸੇ ਸਵਾਦ ਲੋਭ ਦੇ ਅਲੱਗ-ਅਲੱਗ ਵੱਖਰੇ-ਵੱਖਰੇ ਅੱਛਾ ਜੀ ਇਹਨਾਂ ਦੇ ਆਪਣੇ ਦੇਖਣ ਦਾ ਰੂਪ ਦਾ ਰੰਗ ਦਾ ਰਸ ਕੋਈ ਰੰਗ ਦਾ ਰਸ ਹੈ ਕੋਈ ਰੂਪ ਦਾ ਰਸ ਹੈ ਕੋਈ ਪੁਛ ਰਸ ਕੋਈ ਸਪਰਸ਼ ਰਸ ਹੈ ਕੋਈ ਨਾਕ ਦਾ ਸੁਗੰਧ ਦਾ ਰਸ ਹੈ ਸੁਆਦ ਦਾ ਰਸ ਹੈ ਇਹ ਦਸਾਂ ਚੁੜਦਿਆਂ ਅੱਛਾ ਜੀ ਦਸੇ ਸਵਾਦ ਲੁਭਾਈਆਂ ਮਾਇਆ ਮੋਹਣੀ ਮੋਹੀਆ ਨਿਤ ਫਿਰੇ ਭਰਮਾਈਆਂ ਮਾਇਆ ਗੋੜੀ ਬੋਇਆ ਇਹਨਾਂ ਨੂੰ ਮਾਇਆ ਗੋੜੀ ਨੇ ਬੋਇਆ ਹੈ ਸਾਰਿਆਂ ਨੂੰ ਜੀਵਾਂ ਨੂੰ ਜਿਤ ਬਰੇ ਸਾਰੀਆਂ ਪਰਮ ਦੇ ਜਿੰਦਗੀ ਦੇ ਪਰਮੀਆਂ ਬਿਲਦੀਆਂ ਰੂਹ ਰੂਹਾਂ ਦੇ ਗਿਆਨ ਇੰਦਰੀਆਂ ਵੀ ਗਿਆਨ ਇੰਦਰੀਆਂ ਦੇ ਪਿਛੇ ਰੂਹ ਹੀ ਨਾ ਅੱਛਾ ਜੀ ਹਾਠਾਂ ਦੋਵੇਂ ਕੀਤੀਉ ਸ਼ਕਤ ਵਰਤਾਈਆਂ शिव आगे ਸਕਤੀ हारियां इवें ਹਰ भाइयां हां हां हां को में कीतियां ਦੋ तरह तरह दो करतीयो दो विरोध दी तरह करते हां तरह दो विरोधी तरह शिव और एको पे शक्ति वरतियां एक शिव शक्ति शिव कोला है एक शक्ति एको दी शक्ति है शिव दी शक्ति है ये रखती हो ये संसार में ਇਹ ਦੋ ਤਰ੍ਹਾਂ ਦੀਆਂ ਸ਼ਕਤੀਆਂ ਨੇ ਵਰਤਾਈਆਂ ਹੋਈਆਂ ਆਪਾਂ ਵਿਰੋਧੀ ਜਿਵੇਂ ਕਿ ਅਤਮਾਨੂੜ ਸਾਚ ਸ਼ਿਵ ਸ਼ਕਤੀ ਵਰਤਾਈਆਂ ਅਤੇ ਸ਼ਿਵ ਸ਼ਕਤੀ ਕਿਵੜਾ ਕਿ ਸ਼ਿਵ ਨੇ ਸ਼ਕਤੀ ਵਰਤਾਈ ਹੈ ਦੁਹਾ ਤਾਂ ਕਿ ਦੇਵਤਿਆਂ ਨੂੰ ਆ ਰਾਖੀਆਂ ਨੂੰ ਸ਼ਕਤੀ ਪਿਰਗਾ ਤੇ ਮਿਲਦੀ ਹੈ ਅੱਛਾ ਜੀ ਸ਼ਿਵ ਨੇ ਸ਼ਕਤੀ ਵਰਤਾਤੀ ਦੋਹਾਂ ਵਾਸਤੇ ਸ਼ਕਤੀ ਦੋਹਾਂ ਦੇ ਵਿੱਚ ਇਕੱٹری ਹੋਈ ਹੈ ਅੱਛਾ ਸ਼ਿਵ ਇੱਥੇ ਹੁਕਮ ਹੈ ਜੀ ਸ਼ਕਤੀ ਹੁਕਮ ਹੈ ਅਜਾ ਸ਼ਿਵ ਫੇਰ ਹਾਕਮ ਹੈ ਜੀ ਕਿਹ ਬਾਦਮ ਠੀਕ ਹੈ ਕਿਉਂਕਿ ਬਹੁਤ ਵਾਰ ਭਲੇਖਾ ਪੈਂਦਾ ਨਾ ਹੋਵੇ ਕਿਤੇ ਜਿਹੜਾ ਉਹਨੂੰ ਤਾਂ ਮਹਾਦੇਵ ਕਹਿੰਦੇ ਆ ਜੀ ਆਉ ਤਾਂ ਮਹਾਦੇਵ ਠੀਕ ਹੈ ਜੀ ਤੇ ਜਿਹੜਾ ਸ਼ਿਵਾ ਸ਼ਬ ਬਣਿਆ ਸ਼ਬਦ ਉਹ ਵੀ ਇਤੋਂ ਹੀ ਬਣਿਆ ਸ਼ਬਦ ਨੂੰ ਸ਼ਬਾ ਕਹਿੰਦੇ ਨੇ ਇਹ ਪਰ ਉਹ ਵਾਚਕ ਸ਼ਬਦ ਹੈ ਨੀ ਇਸਤਰੀ ਵਾਚਕ ਹੈ ਜੀ ਆਏ ਬਲੰਡ ਅੱਛਾ ਜੀ ਅਜਾ ਸ਼ਿਵ ਅਗੇ ਸ਼ਕਤੀ ਹਾਰੀਆਂ ਏਵੇਂ ਹਰਪਾਈਆਂ ਕਿਹਦਾ ਅੱਗੇ ਸ਼ਕਤੀ ਹਾਰਿਆਂ ਹਾਰਿਆਂ ਜੇ ਛਿਬਦੇ ਅੱਗੇ ਸ਼ਕਤੀ ਹਾਰ ਮੰਦ ਜਵੇ ਜੇ ਬੁੱਧੀ ਆਪਣੇ ਬੂਲ ਦੇ ਅਗੇ ਹਾਰ ਮੰਦ ਜਵੇ ਇਹਵੇਂ ਹਰਪਾਈ ਇਸ ਤਰੀਕੇ ਨਾਲ ਜਹਾਂ ਲੂਪ ਆ ਜਾਂਦੀ ਫਿਰ ਹਾਲੂਪ ਆ ਜਾਂਦਾ ਜਿੰਨਾ ਜਿਹੜੀ ਬੁੱਧੀ ਹਾਲਦੀ ਬੁੱਧੀ ਜਿੰਨਾ ਕਿ ਬੁੱਧੀ ਆਪਣੀ ਕਲਾ ਦਾ ਮਾਣ ਕਰਦੀ ਹੈ ਸਤਿਗੁਰ ਦੀ ਦਾਲੀ ਉਹ ਚਰ ਗੁਰ मेरी ਦੀ थोड़ी राम ਮਤ ਥੋੜੀ ਰਾਮ ਕਹਦੀ ਹੈ ਫਿਰ ਪਰਮੇਸ਼ਰ ਦੇ ਦਰਜ ਪ੍ਰਵਾਨ ਹੋ ਜਾਂਦੀ ਹੈ ਅੱਛਾ ਸ਼ਿਵ ਅੱਗੇ ਸ਼ਕਤੀ ਹਾਰੀਆਂ ਏਵੇਂ ਹਰ ਭਾਈਆਂ ਜਿਹੜੀਆਂ ਹਾਰ ਜਾਂਦੀਆਂ ਨੇ ਉਹ ਭਾਜ ਜਾਂਦੀਆਂ ਨੇ ਉਹਨੂੰ ਉਹਨਾਂ ਦੀ ਘਰ ਐਡਰੀ ਹੋ ਜਾਂਦੀ ਹੈ ਠੀਕ ਹੈ ਜੀ ਇੱਕ ਵਿੱਚੋਂ ਹੀ ਇਹਨਾਂ ਸਾਰਿਆ ਦੇ ਜਿਹੜੇ ਇੱਕ ਹੋ ਗਿਆ ਪਿੱਛੋਂ ਹੀ ਰੱਖ ਲਿਆ। ਬੁੱਧੀ ਦਾ ਹਾਰ ਬੁੱਧੀ ਦਾ ਪ੍ਰਵਾਨ ਤੋ ਵੀ ਹੋ ਜਾਂਦੀ ਹੈ। ਭਲੇ ਹੋਈ ਹੋਈ ਹੈ ਜਿਹੜੀ ਉਹ ਇੱਕ ਹੋ ਗਈ। ਮਨੇ ਮਨ ਨੂੰ ਬਣਾ ਲਿਆ ਇੱਕ ਹੋ ਗਈ। ਉਹ ਵੀ ਆ ਜਿਹੜਾ ਕਰ ਲਿਆ ਰੱਖ ਜੋ ਸਤ ਸੰਗ ਨਾਲ ਆਈਆਂ ਜਿਹੜੀਆਂ ਸਾਥ ਸੰਗ ਪਹਿਲਾਂ ਉਹ ਸਤ ਦੇ ਜਿਹੜੀਆਂ ਵੀ ਰਹੇ ਸੀ। ਸਾਧ ਦੇ ਵਿੱਚ ਮਿਲ ਕੇ ਹੋਰ ਗੱਲ ਦਾ ਆਪਣੇ ਆਪ ਦੇ ਤੌਰ ਤੇ ਹੱਟ ਛੱਡ ਦੇਣਾ ਹੋਰ ਗੱਲ ਹੈ। ਸੱਤ ਜੰਗ ਵੀ ਵੈਸੇ ਹੀ ਤਾਂ ਹੱਟ ਛਡਾਉਂਦੀ ਹੈ। ਬਹੁਤ سارے ਆਦਮੀ ਹਟ ਕਰਦੇ ਠੀਕ ਹੈ ਜੀ ਇੱਕ ਵਿੱਚੋਂ ਹੀ ਤੁਦ ਰੱਖਿਆ ਜਿਹੜੇ ਇੱਕ ਹੋ ਗਏ ਉਹ ਬਚ ਗਏ ਹਨ ਜੀ। ਉਹ ਰਕਲੇ ਵਿੱਚੋਂ ਪਰਲੇ ਸੱਤ ਸੰਗਤ ਬਲਾਤ। ਜੋ ਸੱਤ ਮਿਲਾਈਆਂ ਉਹਨਾਂ ਦੀ ਸੰਗਤ ਸੱਤ ਨਾਲ ਹੋ ਗਈ ਹੈ ਜੀ। ਆਹ ਉਹ ਸੱਤ ਸੰਗੀ ਬਣ ਗਏ। ਠੀਕ ਹੈ ਜੀ। ਜਲ ਵਿੱਚੋਂ ਬਿੰਬ ਉਠਾ ਲਿਆ ਜਲ ਮਾਹੀ ਸਮਾਈਆ ਜਿਵੇਂ ਜਲ ਦੇ ਵਿੱਚੋਂ ਬੁਦਬੁਦਾ ਪੈਦਾ ਹੁੰਦਾ ਹੈ ਜਿਵੇਂ ਜਲ ਦੇ ਵਿੱਚੋਂ ਲਹਿਰ ਪੈਦਾ ਹੁੰਦੀ ਹੈ ਉਹ ਜਲ ਕੇ ਸਮਾ ਜਾਂਦੀ ਹੈ ਮੈਂ ਉਹ ਉਠਾਲਿਆ ਜਲ ਬੁਰੇ ਜਿਵੇਂ ਜਲ ਚੋਂ ਹੋਣਾ ਹੈ ਜੇ ਲਹਿਰ ਜਲ ਚੋਂ ਉੱਥੇ ਵੀ ਜਲ ਹੈ ਨੇ ਜਲ ਦੇ ਵਿੱਚ ਹੀ ਸਮਾ ਜਾਣਾ ਇਹੋ ਜਿਹੀ ਆਤਮਿਕ ਗੱਲ ਹੈ ਕਿ ਆਕੀ ਹੋ ਕੇ ਉੱਚੀ ਹੋਗੀ ਬੰਦਲੇ ਆਏ ਹੰਕਾਰ ਹੋ ਗਿਆ ਅਜਾ ਹੰਕਾਰ ਛੱਡੂ ਸਮਾਜੂ ਜਿਨ੍ਹਾਂ ਜਿਹੜੇ ਅੰਕਾਰ ਹੈ ਉਹਨਾਂ ਜਿਹੜੇ ਆਪਣੇ ਆਪ ਨੂੰ ਚਾ ਸਮਝਦੇ ਉਹਨਾਂ ਜਿਹੜੇ ਲਹਿਰ ਰੂਪ ਹੈ ਦੋ ਕਰਕੇ ਲਹਿਰ ਰੁਕਦੀ ਨਹੀਂ ਹੈ ਤੇ ਲੋਭ ਦਾ ਤਿਆਗ ਕਰ ਦਨ ਅੰਕਾਰ ਛੱਡ ਦਿੰਦਾ ਫਿਰ ਸਮਾ ਜਾਂਦਾ ਤੇ ਹਾਂਜੀ ਠੀਕ ਹੈ ਜੀ ਇੱਥੇ ਛੇਵੀਂ ਪੌੜੀ ਦੀ ਸਮਾਪਤੀ ਹੈ ਜੀ